अगंत सा अपनी वे राह से साथ प्रीत पर पे अनंत उल्लास अनंत अच्छा अपनी वे राह चले चाहे देखो चाहे मिलतiana चाहे अगणता अगणता एजा कोई और सा है जी कण जे होर होता दा करते हो जत विति-मिति च नहीं है ਇੱਕ ਦਸ ਕੀ ਦੇ ਬਾਅਦ ਦੋ ਤਾਂ ਫਿਰ ਦੀ ਸ਼ੁਰੂ ਹੋ ਜਾਂਦੀ ਹੈ। ਜਾਂ ਦੁਆ ਹੈ ਦਾ। ਜਾਂ ਦੁਆ ਹੋਊ ਜਾਂ ਸ਼ੁਰੂ ਹੋ। ਮਾਇਆ ਰਹਿ ਮਾਇਆ ਰੂਪ ਵਿੱਚ ਫਲਸਾ ਤੋ ਜਾਣਾ ਕਿ ਸਾਹ ਮਾਇਆ ਦੇ ਵਿੱਚ ਬਹੁਤ ਗੁੜੀ ਹੈ। ਮਾਇਆ ਬਹੁਤ ਰੰਗ ਰੂਪ ਹੈ। ਇੱਕ ਦਾ ਤਾਂ ਇੱਕੋ ਰੰਗ ਹੈ, ਇੱਕੋ ਰੂਪ ਹੈ। ਕੋਲਾ ਦੁਆ ਕੋਈ ਹੈ ਦੀ। ਉਹ ਗੁਰਤੀ ਦੇ ਉੱਪਰ ਮਾਇਆ ਜਿਹੜਾ ਰੂਪ ਹੈ ਦੁਆ। ਦੂਰੀ ਪਾਇਆ ਹੈ ਇਹਦੇ ਵਿੱਚ ਗੱਲ ਨਹੀਂ ਆ ਸਾਥ ਵਿੱਚ ਗੁੰਝੀ ਨਹੀਂ ਹੈ ਸਾਥ ਨੂੰ ਆਗਰ ਤੱਕ ਨਹੀਂ ਦੇ ਸਾਜ ਦਾ ਰੂਪ ਨਹੀਂ ਹੈ ਤੋੜ ਦੇ ਦਰ ਥੋੜਾ ਜਲਾ ਤੋੜ ਰੰਦਾ ਗਿਆ ਬਣ ਗਿਆ ਉਹ ਝੂਠ ਰਲ ਸੋਦੇ ਬਾਥਰੂਮ ਬਣ ਗਿਆ ਉਹ ਝੂਠ ਦਾ ਰੂਪ ਨੇ ਇਹ ਗੱਲ ਬ੍ਰਿੰਕੀ ਨੂੰ ਸਮਝਾਉਣੀ ਅਜੇ ਇੱਕ ਤੋਂ ਦੋ ਗੰਤੀ ਸ਼ੁਰੂ ਕਰਦੇ ਹਾਂ ਬਿਲਕੁਲ ਇੱਕ ਤੋਂ ਮੰਜ਼ਿਲ ਦੀ ਸ਼ੁਰੂ ਇੱਕ ਤੋਂ ਬਲੇਕਿਆ ਹੋਇਆ ਬਿਤੇ ਗਲਤੀਆਂ ਤੇ ਲਿਖਾਉਂ ਤੇ ਬਲੇਕਾ ਗੱਤੀ ਗਨਤਨ ਛੁੱਟ ਗਏ ਜੇ ਇੱਕ ਤੋਂ ਦੋ ਤੇ ਚਲੇ ਗਏ ਫਿਰ ਗੰਤੀ ਸ਼ੁਰੂ ਹੋਏਗਾ ਨਹੀਂ ਫਿਰ ਨਹੀਂ ਫਿਰਦਾ ਜਿੱਥੇ ਤੱਕ ਵਰਦੀ ਦੇ ਰਿਸ਼ਾ ਫਿਰ ਆਜਾ ਰੱਬਾ ਫੇਰ ਗੁਰਪਾ ਗੁਰ ਤੇ ਫੇਰ ਨੂੰ ਕਿਹ ਚਾਹ ਜੰਤੀ ਸ਼ੁਰੂ ਹੋਵੀਂ ਫੇਰ ਕੋਈ ਬਤਨ 3 ਲੱਖ ਰੁਪਏ ਕਹਿੰਦੇ ਦੇ ਕੁਝ ਰੋਟੀ ਦੀ ਅਜੀ ਕਰਵਾ ਨਹੀਂ ਗਈ ਅਰਦਾਸ ਸਰ ਕਹਿੰਦੇ ਹਾਂ ਹਾਲੀ ਕੇ ਤੇ ਆਵਣੀ ਚਾਹਣਾ ਮਤਲਬ ਇਹ ਹਿੰਦੀ ਇਸ਼ਾਰਾ ਕਰਤਾ ਉਸ ਨਾਲ ਉਹ ਵੀ ਜੀਸ ਨੂੰ ਸਭ ਪਤਾ ਹੈ ਜੀ ਫਸਲ ਹੋਈ ਹੀ ਸਹੀ ਰਹਿਣ ਤੋਂ ਨਾ ਕੋਈ ਗੱਲ ਇੱਕ ਨੀ ਕੋ ਬੰਦੇ ਤੇ ਇਹਨੇ ਗਿਆਨ ਨਾਲੇ ਸਾਡਾ ਗਵਾਂ ਚਰਚਾ ਦਾ ਖਾਲ ਨੂੰ ਜਾਣਦੀ ਗਾਂ ਚਰਚਾ ਸ਼ੁਰੂ ਹੋਵੇ ਤੇ ਕੋਲ ਨੂੰ ਲੈ ਕੇ ਅਸੀਂ 100000 ਕਹਿਦਾ ਕਰੀਏ ਗਿਆਨ ਦਾ ਜਾਂ ਚਰਚਾ ਦੀ ਜਾਂ ਬੇਟੇ ਬਟੋਦੀ ਕੁਝ ਗੱਲਾਂ ਇਹਨਾਂ ਦਾ ਕਾਦੀਆਂ ਪੜ੍ਹਨਾ ਝੂਠੀ ਸਾਡਾ ਮਿਲਣ ਹਨਾ ਜੀ ਜਮਤਰੀ ਚਾਹ ਜੋ ਕੇ ਨਾਲ ਹੁੰਦੇ ਨੇ ਇਹ ਕਹਿੰਦੇ ਨੇ ਐਨ ਅਦਿਕਠੀ ਗੀਜ਼ ਜਾਦੂ ਕਰਦੇ ਨੇ ਐਨੇ ਐਜੋ ਬਾਜ ਕਰਦੇ ਨੇ ਜੋ ਵਿਚਾਰੇ ਨੇ ਸੱਤ ਪੰਜ ਨੇ ਅਦਿਕਠੀ ਕਫਾ ਜੀ ਸੱਤ ਜੜੀਆਂ ਅਦਿਕਠੀ ਸੀ ਜੀ ਖੋਲ੍ਹਦੇ ਜਿਹੜੇ ਲੋਗ ਨੇ ਜੀ ਦਾ ਸੱਤ ਲੋਕ ਹੈ ਜਿਹੜੇ ਜੀ ਗੁੱਸੇ ਪਰ ਉਹ ਕਹਿੰਦੇ ਨੇ ਉਹ ਬਾਜ ਕਰਮ ਲਾਉਂਦੇ ਇਨਸਾਨ ਕਰੇ ਠੀਕ ਕਰੇ ਜੀ ਸਾਬ ਜਰਾ ਨਹੀਂ ਦੂਦੇ ਬੇਚਾ ਤਾਂ ਹੁਣਾ ਸੀ ਜਦ ਕੀਆ ਤਬ ਕੀਆ ਨਾਂ ਕੀਆ ਸਬੰਦ ਕੀਆ ਇਹ ਸਾਰੇ ਵਿਸ਼ੇ ਨੇ ਸਾਡੇ ਕੋਲ ਉਹ ਦੇਸਾਂ ਕੀਤੇ ਹਨ ਬੁਰਾਈ ਸੱਚਾ ਝੂਠਾ ਕੀ ਪਰਖ ਕੀਤੀ ਜਾਏਗਾ ਕਿ ਦੇਸਤਾਵ ਦੇ ਵਿੱਚ ਗੱਲ ਪੜੀ ਹੈ ਨੰਬਰ 1 ਦਾ ਪਿਛਤੀ ਹੈ ਸੋਨੇ ਕੀ ਗੱਲ ਹੈ ਪੂਰੀ ਬਹਿਸ ਹੈ ਦੇਸ ਦਾ ਹੋਈ ਜਾਣੇ ਦਾ ਸਬੰਧ ਫੋਲ ਦੇ ਸਕਾ ਦੇ ਮੈਂ ਕਰਕੇਗਾ ਜੇ ਸਕੇਗਾ ਦੇ ਫੋਲ ਕਰਦੇ ਕੀ ਕੀ ਕਹ ਲੈਣੇ ਦੇ ਦੱਸ ਸਕੀਤੀ ਕੀ ਕਿ ਸੰਤਰਾ ਅੱਜ ਦੱਸ ਸਕੀਤੀ ਹੈ ਜਦ ਦੱਸ ਸਕਤ ਨਹੀਂ ਸਿਆ ਦੇ ਗੱਲਾਂ ਉਹਨਾਂ ਨੇ ਬਦਾਂ ਕਿੱਦਾਂ ਗੱਲਾਂ ਹੋ ਰਹੀਆਂ ਅਜੀ ਮਹਾਂ ਦੀ ਗੱਲ ਦੱਸਿਆ ਹੁਣ ਫਿਰ ਤੁਹਾਨੂੰ ਦੇ ਫਿਰ ਦੱਸ ਕਰ ਰਹੇ ਜੀ ਤਾਂ ਬਿਲਕੁਲ ਨਾ ਜਦਿਕਾ ਨੇ ਗੱਲ ਕਰਦਾ ਜੋ ਫੋਰਕੀ ਜੂਰੀ ਬੋਲਦੇ ਚੇਲੇ ਬੋਲਦੇ ਜੂਰੇ ਜੇ ਬਈ ਵੱਲੋਂ ਪਬਲਿਕ ਸੇਵਾ ਨੇ ਜੋ ਖਾ ਦੇ ਜਿਹੜੇ ਆਦਮੀ ਤੁਹਾਨੂੰ ਤੋਂ ਦੁੱਭੀ ਨੇ ਨਾ ਇਹਨਾਂ ਨੂੰ ਕੰਨਸਰ ਬੁਰਾ ਦੋ ਕੋਈ ਨਾ ਦੇ ਲਛੰਡੇ ਦੇ ਦੇ ਹੈ ਉਹਾਰੇ ਉਹ ਮੰਨ ਲਿਓ ਜੂਰੀ ਹਲਦੀ ਚ ਜਿੱਦ ਬਖੇ ਰੋਟੇ ਪਰ ਬੋਲਦੇ ਹੇ ਦਾ جواب ਕੋਈ ਨਹੀਂ ਉਹ ਹੈ ਕੋਈ ਜੋ ਕਹਿੰਦਾ ਜੂਝੂ ਰਹਾ ਤਾਂ ਚੈ ਜਿਹਾ ਖਾ ਚਾ ਰੋ ਸਾਜੀ ਪੋਟਾ ਨੇ ਕੀਤਾ ਬੰਦ ਤੋ ਅਗੰਤ ਸਭ ਆਪਣੀ ਜੀਵਨ ਜਦੋਂ ਹੋ ਜਾਂਦਾ ਜਹਰ ਬਹੁਤ ਔਖਾ ਸਿਰੋਥਾ ਉਤੋ ਜਾ ਗੁਪਤੀ ਬੰਦ ਹੋਈ ਜਾਂਦੀ ਆਪਣੇ ਆਪ ਨੂੰ ਮਾਫ ਕਰਨ ਔਖਾ ਹੋ ਜਾਂਦਾ ਕਈ ਵਾਰ ਤਾਂ ਇਤਨਾ ਬੋਝ ਪੈ ਜਾਂਦਾ ਆਪਣੇ ਆਪ ਤੇ ਅਣਜਾਣ ਪੜੇ ਜਦੋਂ ਕਮ ਗਰੀ ਜਾਂਦਾ ਹੈ ਆਪਣੇ ਆਪ ਨੂੰ ਮਾਫ ਕਰਨ ਔਖਾ ਹੋ ਜਾਂਦਾ ਪਰ ਲੋਗ ਨਾ ਹੱਥ ਕੱਢ ਲੈਂਦੇ ਹੈ ਯੋਗ ਬੱਜੇ ਜੋ। ਦਫਤਰ ਗੱਲ ਵੀ ਜਨਾ ਰਸੂਈ ਚੈੱਕ ਕਰੋ। ਤਾਂ ਅਗਰ ਤੇ ਸਾ ਆਪਣੀ ਦੇ ਰਾਸ ਖਾਂਤ ਪੀਤ ਵਰਤੇ ਆਨੰਦ ਉਲਾਸ। ਅਰੰਭੇ ਸਾ ਸਾ ਇੱਕ ਹੋਇਆ। ਉਹ ਗਿਣਤੀ ਤੋਂ ਬਾਹਰ ਉਹ ਸਭ ਕੋਈ ਨਹੀਂ। ਐਸਾ ਨਹੀਂ ਤਾਂ। ਸਿਰਕਾ ਉਹ ਗਿਆ ਉਪੋ। ਅਗਰ ਤੁਸੀਂ ਆਪਦੀ ਰਾਸ ਰਾਜ ਕੋ ਵਜਤ ਰਾਸੀ ਕੋ ਵਜਤ ਆਪਣੀ ਰਾਸੀ ਸਿੱਧਾ ਸਤਖੰਡ ਸਾਚੀ ਦੰਦ ਉਹ ਤੇ ਰਾਸੀ ਦੀ ਹਜ਼ਾਟ ਕਿਤੇ ਸੱਚੀ ਹੋਈ ਜਾਤ ਸੁਧਨਵਾਸ ਕੜੇ ਜਮਾਲੇ ਜਮਾਲੇ ਦੇਦਰ ਸਰ ਤੇ ਸਾਰੇ ਜਿਮਾਲੇ ਨੇ ਆਲੇ ਦੇ ਸਾਦੇ ਬਲ ਭੁਖੋ ਜੇ ਮੰਨ ਲੈ ਜੀ ਉਹ ਮਨ ਲੱਗ ਜਾਤ ਪੀਤ ਵਰਤੇ ਜਦ ਜਾਲ ਜੇੜਾ ਕੁਬੀਨ ਕਟਾਲਾ ਮਾਰ ਕੇ ਖਾਣ ਵਾਲੇ ਉੱਤੇ ਜਾਲ ਲੇ ਹੋਰ ਕੀ ਦਰ ਜਾਨਵਰਾਂ ਦਾ ਸ਼ਿਕਾਰੇ ਕਰਦੇ ਲੋਕ ਲੈ ਲੋਕਾਂ ਨੂੰ ਦਰਮਿਆਨ ਦੇ ਨਾਮ ਦੇ ਜਾਲ ਲੈ ਚਾਹੇ ਹੋਰ ਕੀ ਦਰ ਹੈ ਜਦੋਂ ਬਾਜਾ ਤਾਤ੍ਰੀਤ ਵਰਤੇ ਆਨੰਦ ਉਲਾਸ ਤਾਤ੍ਰੀਤ ਵਰਤਾ ਆਨੰਦ ਉਲਾਸ ਅਫਾਜ਼ੀ ਜੁਦੀ ਹੰਦੀ ਜੁਦੀ ਹੈ ਆਨੰਦ ਉਲਾਸ ਨੂੰ ਵਰਤਿਏ ਜੀ ਜੇ ਨਾਲ ਤਾਂ ਕੋਈ ਹੈ ਆਪਣੇ ਅਮਾਨ ਕੁਛ ਬਾਹਰ ਪਾ ਲੇ ਬਹੁਤ ਸਾਦੇ ਬਹੁਤ ਮਨ ਰੋਸ਼ ਕਰੇ ਉਹ ਸਾਜੇ ਆਪਣੀ ਵਾਨ ਤੱਕ ਕਿਸੇ ਕੋਲ ਪਾਸੇ ਲੈ ਲਵੈ ਦੇਖੋ ਸਾ ਸਾਨੂੰ ਆਨੰਦ ਦਿੱਤੀ ਜੀ ਪਹਿਲੀ ਗੱਲ ਹੈ ਹਾਜ਼ਰੀ ਆਮਨਤ ਆਪਣੇ ਵੰਨ ਚਾਹੇ ਕੁਝ ਵੀ ਹੋਵਨ ਦਾ ਦੋਸਤ ਇਹ ਆਮਨਤ ਦਾ ਆਪਣੀ ਹੈ ਆਪਣੇ ਵੰਨ ਕਿ ਬਾਹਰ ਸ਼ਾਹ ਲੈ ਜਿਹਾ ਵਾਪਸ ਲੈ ਆ ਗਿਆਨੀ ਮਨ ਰੋਜ਼ ਕਰ ਲਵੇ ਚਾਹੇ ਉਹ ਰਾ ਦੇ ਹੋਰ ਤੋਂ ਸਦੀ ਦਾ ਖਤਰਾ ਕੋ ਕੋ ਜੀ ਜੇ ਇਹ ਮੰਗਲੇ ਦਾ ਰੋਸ ਕਰਦਾ ਅਗਿਆਨੀ ਮਨ ਰੋਸ ਕਰੇ ਮਾਇਆ ਰੋਸ ਕਰਦਾ ਤੇ ਆਦਮੀ ਕਹਿੰਦਾ ਇਹ ਜਿਹਾ ਜਿਹੀ ਲੱਗਾ ਉਹ ਆਈ ਰ ਅਸਿਸ ਅਗਿਆਨੀ ਮਨ ਕਰਦਾ ਅਗਿਆਨੀ ਵੀ ਕਰਦਾ ਅਗਿਆਨੀ ਕਰਦਾ ਉਹ ਪਛਗੜਦਾ ਸੀ ਕਿੱਥੇ ਮੋੜਦਾ ਜਾਣਦਾ ਸੀ ਸਭ ਤੋਂ ਸੇ ਆਇਆ ਵੀ ਕੋਈ ਪ੍ਰਾਇਤਿਕੀ ਜੰਮ ਗਾਦੀ ਜੀ ਆ ਗਿਆ ਸੀ ਮਦ ਉਸ ਕਰੇ ਉਹ ਬਣਾ ਗਿਆ ਉਹ ਹਾਂ ਨਹੀਂ ਜਾਕ ਕਰੇ ਜੀ ਜੀ ਸੁਣਦੇ ਬਾਚ ਲਵਨ ਜੀ ਕਬ ਹੋਏ ਬੱਜਾ ਤੇ ਹੱਥ ਨਾਲ ਵੋਟਾ ਫੜਿਆ ਹੋਏ ਕਹਾਂ ਚੱਲਣਾ ਸੀ ਹੈ ਨਹੀਂ ਚੱਲਣਾ ਸਦਾ ਰਾਤ ਕਰਕੇ ਪਿਛੋਂ ਬਗਲ ਮੈਂ ਛੱਡ ਜਾਣਾ ਕਿਸੇ ਬੰਦੇ ਚਾਹੀਦੇ ਹੈ ਜੀ ਜਾਇਦਾ ਹੋਇਆ ਹੈ ਪਿਛੋਂ ਦੋਤਾ ਰਹਿ ਇਹਨੇ ਸੈਂਕੜਾ ਜੀ ਹੋ ਗਏ ਸੋ ਜਬ ਗੁਰੂ ਸਾਹਿਬ ਜੀ ਬੋਲਿਆ ਜੀ ਦੋਨ ਹਾਲ ਤੇ ਉਹ ਵੀ ਉਹਨਾਂ ਨੇ ਕਹਿ ਦਿੱਤੋ ਜਿੰਦ ਕਰੋ ਨਾ ਲੈ ਜੇ ਦੋਤੀ ਉਹਨਾਂ ਨੇ ਤੁਸੀਂ ਜੇ ਲੋਨਸ ਆਹ ਕਹਨਾਂ ਵੀ ਗੁਰੂ ਤੁਸੀਂੋਂ ਕੰਨ ਦੋ ਸਾਡੇ ਦੇ ਲਾਲਾ ਇੱਕ ਤੁਸਾ ਨਾਲ ਸਾਰੇ ਬੂਲ ਜਲਣਾ ਕੰਮ। ਤੋ ਆਪ ਕੇ ਨਾ ਲੋਕਾਂ ਨੂੰ ਤੁਸੀਂ ਨਾ ਹੋਗਾ ਜਰਾ ਸਹੀ ਸਹੀ। ਸਾਡੇ ਦੇ ਦੋ ਲੜਕੇ ਕਰਨਗੇ ਤੈਨੂੰ ਹੋਰ ਲਾ ਦੇ ਜਰਾ। ਨਾਲੋ ਜਿਆਦਾ ਹੈ ਨਹੀਂ ਉਹ ਵੀ ਕਹਿ ਰਾਣੀ ਤਾਂ ਲਾਉਣੇ ਤਾਂ ਨਹੀਂ। ਮੈਂ ਤੇਰੇ ਤਾਂ ਪੂਰਾ ਤਾਂ ਆਪਣੀ ਤਰਦੀਦ ਆਪ ਹੀ ਹੋਵੇ। ਬਾਰੂ ਸਭ ਇਸ ਵਾਸਨਾ ਹੋਵੇ ਆਪਣੇ ਪ੍ਰਤੀਤ ਆਪ ਹੀ ਖੋਗਾ ਇਹ ਕਰਕੇ ਆਪਣੀ ਪ੍ਰਤੀਤ ਆਪ ਖੋ ਲਈ ਜੀ ਹੋ ਰੰਦਾ ਇਹ ਮਨ ਰੋਸ ਕਰਦਾ ਹੈ ਜਦੋਂ ਕੋਈ ਨੁਕਸਾਨ ਹੋ ਜਾਂਦਾ ਤਾਂ ਉਹਦੀ ਪ੍ਰਤੀਤ ਘਟਦੀ ਹੈ ਸੱਚਖੰਡ ਚਾਹ ਰੱਲਦਾ ਹੈ ਕਿ ਉਹ ਰੋਸ ਕਰਦਾ ਹੈ ਰੋਸ ਕਰਦਾ ਉਹ ਸੇਲਗਾ ਲੈ ਕਰ ਗਾਦੀ ਉੱਥੇ ਹੋ ਰਿਹਾ ਤੁਰਾ ਤੇ ਖਰਾਬ ਸਾਧੂ ਚਾਹੇ ਨਾ ਬਤਾਓ ਅਰੇ ਜਾ ਕੇ ਕਹਿ ਦੰਨਿਆ ਬਹੁਤ ਜ਼ੁਲਮ ਹੋਇਆ ਬੇ ਮਾਤਾ ਰੱਬ ਨੇ ਜ਼ੁਲਮ ਕੀਤਾ ਯਾਰ ਸਾਤਾ ਸੋਨੇ ਦਾ ਸਾਧੂ ਆ ਗਿਆ ਵੀ ਮਰੋਸ ਆਪਣੀ ਪ੍ਰਕੀਤ ਆਪ ਹੀ ਬੋਲੇ ਬਾਹਰ ਉਸਤਾ ਉਹਦਾ ਬਿਸ਼ਵਾਸ ਨਹੀਂ ਕਰਦਾ ਐ ਨਹੀਂ ਜਿੰਨੇ ਰੋਸ ਕਰਵੇਦਾ ਬਿਸ਼ਵਾਸ ਨਹੀਂ ਹੈ ਜਿੱਥਾ ਹੈ ਬਿਸ਼ਵਾਸ ਆਉਂਦੀ ਅਲਕੀੜਾ ਦੇਸ ਨੂੰ ਜਿਆਦਾ ਗੱਦੀਆਂ ਪਾਦੀ ਨੇ ਇਹ ਨਹੀਂ ਕਰਦਾ ਤਾਂ ਉਹ ਹੈ ਇਹ ਉਸਦੀ ਪਰਸੇ ਕੋਰੇ ਨੂੰ ਜੇ ਤੀ ਨਾਮ ਨਹੀਂ ਮਾਰਨਾ ਇਹ ਤਾਂ ਪ੍ਰੋਸਾਰੀਆ ਅੱਪੀਲਾਹ ਤੋਂ ਦੇਗੀ ਤੂੰ ਆ ਦੁਨੀਆ ਮਾਤਾਂ ਤੇ ਦੇ ਲੈ ਪਹਿਲਾਂ ਤੂੰ ਚਲ ਕੌਡੀਆਂ ਨੂੰ ਧਿਆਨ ਦਿਵਾਦਾ ਨੂੰ ਆਂ ਮੈਂ ਮਨ ਹੋਇਆ ਵੀ ਆਪਾਂ ਦੰਦੋਂ ਤੇ ਨਾ ਬੋਲਦਾ ਆਇਆ ਉਹ શરીਤ ਤੇ ਕੀ ਮਾਹਰ ਜੀ ਗਿਆんだろう ਤੇ ਜਿੰਨਾਂ ਸਿੱਖੂ ਜੀ ਮਾਨੂੰ ਯਾਦਵਾਲਾ ਫਿਰ ਨਹੀਂ ਲੱਗਦਾ ਨਹੀਂ ਨਹੀਂ ਨਹੀਂ ਉਹ ਨਹੀਂ ਕਹਿੰਦਾ ਉਹਦਾ ਗਾਣਾ ਉਹ ਵਿਚੇ ਹੀ ਆ ਗਿਆ ਨਾ ਹਾਂ ਕਿਵੇਂ ਕਰਿਆ ਜਾਲੇ ਹਾਂ ਪਹਾੜ ਦੇ ਤਾਂ ਤਾਂ ਜਾਂਦਾ ਹੈ ਪਹਾੜ ਦੇ ਕੋਈ ਰੌਲਾ ਪਹਾੜ ਦੇ ਕਰਿਆ ਜਾਂਦਾ ਸਭ ਕੁਝ ਜੇ ਬੁਰਦਾ ਕੋਈ ਜਾਂਦਾ ਕੋਈ ਨੰਸਾ ਲੰਡਾ ਤੂਹ ਹੋ ਲੋ ਹੋ ਗਈਆ ਤਾਂ ਹੋਦੀ ਪੇਰਾਤ ਇਹ ਤਾਂ ਲੋ ਹੋ ਗਈ ਦੋ ਹੋਦੀ ਗੱਲ ਆ ਗਈ ਉਹ ਬੰਦੀ ਗੱਲ ਲੈ ਇੱਕ ਮਗਾਣ ਕੋਈ ਤੁਹਾਂ ਲੱਗਦਾ ਗੱਲ ਗੱਦੀ ਦਾ ਨਸਾ ਨੂੰ ਦਾ ਸਾਹ ਕਹਿੰਦੇ ਤੇ ਦਵਾ ਫੇਜੀ ਗੱਲ ਲੈ ਰਸੇ ਉਹਦੀ ਗੱਲ ਹੈ ਉਹ ਕਾਇਨਨ ਦੇ ਗੌੜੀਆਂ ਦੇ ਜੀਵੋ ਵਿਸ਼ਵਾਸ ਚਲਾ ਗਿਆ ਅਸਲ ਪ੍ਰਤੀਸ਼ੀ ਦੀ ਦੀ ਪ੍ਰਤੀਸ਼ੀ ਵਾਲੀ ਹੈ ਅਸਲ ਉਹ ਪਹਿਲਾਂ ਪ੍ਰਤੀਸ਼ੀ ਤੇ ਹੀ ਬਰਦੀਏ ਗੱਲ ਅਸਲ ਗੌੜੀਆਂ ਦੀ ਪ੍ਰਤੀਸ਼ੀ ਗੱਲ ਜਿਉਂ ਦੇਲੀ ਜਦ ਨਹੀਂ ਇਹ ਬੋਲਦਾ ਇਹ ਤਾਂ ਇਹ ਮਨਦਾ ਇਹਦਾ ਇਹ ਬੱਸਦਾ ਉਹ ਨਾ ਕਰਨੇ ਕਰੇ ਦਾ ਪਤਾ ਇਹਦਾ ਇਹ ਮੰਨਦਾ ਇਹ ਫੁੱਟਲ ਲਾ ਗਿਆ ਬਸ ਉਹ ਉਹਦੇ ਦੇ ਲਈ ਦਿੱਤਾ ਇੱਕ ਵੀਧੀ ਦੇ ਲਈ ਉਹ ਵੀ ਇਹਨੇ ਮੰਗ ਲਈ ਉਹ ਕਹਿੰਦਾ ਨਹੀਂ ਮਿਲਦੀ ਐ ਕਿਉਂ ਨਹੀਂ ਮਿਲਦੀ ਐ ਤਾਂ ਉਹਨੂੰ ਕਹਦਾ ਉਹ ਤਾਂ ਚਲੋ ਗੱਲ ਐ ਕਿਉਂ ਤੁਸੀਂ ਪਰ ਇਹ ਤਾਂ ਉੱਥੇ ਹੀ ਉਹਨੇ ਲੈ ਮੈਂ ਉੱਥੇ ਹੀ ਮੁਖਲਾ ਹੋ ਗਿਆ ਹੁਣ ਉਹਨੂੰ ਪੁੱਛਿਆ ਵੀ ਦੂਆ ਹੈ ਕੋਈ ਹੈ ਜਿਹੜਾ ਤੇ ਦੂਆ ਦਊ ਕੋਈ ਕਿਸੂ ਕੋਥੇ ਰਿਆ ਉਹਦਾ ਉਹਦਾ ਫਾਕੀ ਕੋ ਵੀ ਸਕਦਾ ਹੈ ਇਹ ਜਾਣਦੇ ਹੋਏ ਵੀ ਇਦਾਂ ਦਾ ਸੰਸਾਰ ਇੱਦਾ ਬੂਰਖਸ ਤੇ ਦੁਆਗਾ ਹੈ ਨਹੀਂ ਖੋਪੀ ਸਕਦਾ ਇਹ ਵੀ ਜਾਣਦਾ ਦੇ ਵੀ ਬੇਜੇ ਜਸੂਤ ਇਸ ਅਕਲ ਜਿਹਦੀ ਹੈ ਉਹਨੇ ਸੱਚਾ ਦੱਸਿਆ ਤੁਹਾਨੂੰ ਕਿੱਡਾ ਅਕਲਵੰਦ ਸੰਸਾਰ ਸਾਂਝਾ ਮੋਹੁਰਖੰਦ ਕੋਹਰ ਜੋਰਹਰੰਖੋਲ ਉਹ ਗੱਲ ਦਾ ਗਹਿਰਾਇਤ ਦਾ ਉਦਾਹਰਨ ਜਦੋਂ ਕੋਣ ਆਜੀ ਨਹੀਂ ਹੈ ਜਸ ਕਿੰਨਾ ਬਚੇ ਹੋਏ ਨੇ ਗੋਧਾਨੇ ਦਾ ਜੈਸਾ ਮੋਹੁਰਖੰਦ ਕੋਹਰ ਜੋਰਹਰੰਖੋਲ ਅਗਲੇ ਆਖੇ ਹੋਏ ਫਿਰ ਜਾਦੇ ਅਗਲੇ ਬੁਣਾ ਦੇ ਵੀ ਅਗਿਲਾ ਸੀ ਨਾ ਜਲਦੀ ਵੀ ਇਹ ਤਾਂ ਗੱਲਾਂ ਦੀ ਬਰਬਾਦੇ ਫਿੜਕੇ ਸੇ ਫਟਕੇ ਛਿੜਕੇ ਹੋਏ ਤੇ ਉਹ ਜਾਂਚ ਕਰਦਾ ਹੈ ਆਵਰਾ ਦੇ ਪਾਰੇ ਵਰਖਾ ਫਮੀ ਜਿਹਨੇ ਕੌੜੀਆਂ ਗਰਦਾਂਂ ਗਿਆ ਉਹਦਾ ਲੱਛਾ ਸਾਰੀ ਸੀ ਜੇ ਨਾ ਕੈਂਦੇ ਫੈਲਾ ਜੇ ਨਾਇ ਬੰਦ ਬੂਦੇ ਸਾਰਾ ਨੱਚਾ ਦਿਖਾਇਆ ਉਹ ਜਿਹੜੀ ਥੋੜਾ ਅਦਵਾਰ ਚੱਕਿਆ ਹੋਇਆ ਸੀ ਸਮਾਥਨ ਦਾ ਦੇਣ ਗਏ ਤੇ ਉਹ ਥੋੜਾ ਅਦਵਾਰ ਬੰਨੋੜ ਗਏ ਸਨ ਪਰ ਹਾਜੇ ਅਦਵਾਰ ਖੜੇ ਹੈ ਜੀ ਤੁਸੀਂ ਜੇ ਉਹਨੂੰ ਨਹੀਂ ਸੀ ਕਹਿੰਦੇ ਉਸ ਦਾ ਦੂ ਇਹ ਤਾਂ ਉਹ ਤੁਸੀਂ ਮੂਰਖੇ ਨਹੀਂ ਮੂਰਖਾ ਤੂੰ ਦੂਹੇ ਦਾ ਦਾਖਰ ਹੋ ਮੈਂ ਉਹ ਥੋੜੇ ਜਿਹਾ ਵਾਲ ਹੈ ਮੈਂ ਛੋਟੀ ਕਹਿੰਦਾ ਜਿਵੇਂ ਨਹੀਂ ਮਿਲਦਾ ਇਸੇ ਵਾਰ ਹੈ ਛੱਤ ਕੋੜ ਦਾ ਦਾਖਰ ਹੋ ਇਹਦਾ ਦਵਾ ਹੈ ਤੇਰਾ ਦਾ ਵਾਰ ਜੋ ਵੀ ਹੋਵੇ ਐਈਏ ਵੰਸਾ ਤਾਰਨ ਜਿਹੜਾ ਉਦੋਂ ਉਦਿਸ ਵਾਰਿ ਕਹਦਾ ਇਹਨੂੰ ਗੱਲ ਕਰੇ ਵਾਰਿ ਕਰਦਾ ਇਹ ਤੇਰਾ ਕਰਦਾ ਜੇ जे ਕਰਦਾ ਇਸ਼ है इस करके तो जेनु समझ आजवे जे तू खोजा कर कि ये क्यों ना कर दे दे मैं बस उपासना करता फलोदर धार अपना धरतो उपासना है चुप हां जे हो सकदा कर दो ये ਹੈ ਜੀ ਉਹ ਬਿਆਦਾ ਤੋਂ ਜੇ ਜੁਬਾ ਦੀ ਹਾਂ ਜੇ ਦੀ ਦੀ ਬਾਰਦੀ ਸਰਮੀਦਿ ਚ ਕਰੀ ਰਹੀ ਹੈ ਜੇਕੀ ਬਾਸਤ ਸੱਚੇ ਰੱਖ ਦੀ ਆਗਿਆ ਮੰਨਦੇ ਵਾਸਤੇ ਜੇ ਵੀ ਬਸਤਾ ਹੈ ਉਹਦੇ ਦੇ ਹਰ ਬਸਤੇ ਉਹਦੇ ਕੋਈ ਜਾਂਦੇ ਚ ਸਰਵ ਵਿਆਪਕ ਹੈ ਕੋਈ ਬਾਤ ਉਹਦੀ ਮੰਨ ਕੇ ਹੀ ਰੱਖ ਤੂੰ ਆਪਣਾ ਹੋਰ ਜਾ ਕੇ ਨਾ ਜਿੱਤੇ ਆਦਲਾ ਰਹਿਆ ਜਾਓ ਸਰਪਿਆਪ ਕਰ ਫਸ ਪਈ ਐ ਕੋਈ ਮਨ ਉਹਦੇ ਅੱਗੇ ਪਈ ਐ ਤੇਰਾ ਮਾਲਕ ਉਹਦੇ ਕੋਲ ਪਈ ਐ ਚੱਕ ਕੇ ਹੋਰ ਨੂੰ ਦੇਤੀ ਤੇ ਲੋੜੋਂ ਦੇਤੀ ਉਹਨੇ ਕਿਉਂ ਲੈ ਗਿਆ ਉਹ ਵੀ ਉਹਨੂੰ ਪਤਾ ਹੋਊ ਤੇ ਚੱਕ ਕੇ ਕਿਉਂ ਬਦਲ ਲਈ ਉਹ ਕੱਲ੍ਹ ਉਹਦੇ ਜੇ ਉਹਨੇ ਬਦਲ ਲਈ ਤੂੰ ਮੱਥੇ ਖਬਰਾਂ ਇਥੇ ਲੱਗਿਆ ਉਹਨੂੰ ਜ਼ਿਆਦਾ ਚੀਜ਼ ਰੱਖਣੀ ਹੋਵੇ ਜੇ ਤਾਂ ਥੋੜੀ ਚੀਜ਼ ਪਈਆ ਉਹਨੂੰ ਰਜਾ ਕੇ ਸਫਾਈ ਕਰਕੇ ਵਧੀਆ ਚੀਜ਼ ਲੈ ਕੇ ਜਾਣਾ ਰੱਖਣੀ ਹੋਵੇ ਤੇ ਤੁ ਕੀ ਲੋੜ ਹੈ ਰੋਸਰ ਜਗਾਵਿਓ ਰਿਆ ਜਿਜਬਿਓ ਰਿਆ ਤੇਰੀ ਪਹਿਲੀ ਦਾਦੀ ਹੈ ਮਾਣੀ ਮੋਟੇ ਚੌਂਕੀ ਦਾਦੀ ਹੈ ਫਿਰ ਚੌਂਕੀ ਦਾਦੀ ਕਰੀਏ ਤੂੰ ਜੋ ਕਿਦਾੂ ਕੀ ਲੱਗੇ ਕਿ ਨਾਮ ਨਾਲ ਉਹ ਜਮਾਤ ਚਲਾਏਗਾ ਕਿ ਗਾਦਿਆ। ਜੋ ਕਿਦਾ। ਰੱਬ ਕੀ ਆ ਗਿਆ ਮਾਨੇ ਮਰਾਨੇ। ਜੋ ਆਏ ਤਾਂ ਕੰਮ ਲੈਣ। ਤਬੇ ਦਾ ਜੋ ਪਈਏ ਉਹ ਜੱਫੀਰ ਗੋਦ ਲੈ ਕੇ ਦੇਖੋ ਬੋਲ। ਜੇ ਕੀ ਤੋਂ ਗੋਲ ਮੈਂ ਕੀ ਆ ਗਿਆ ਮਾਨਾ। ਰੱਬ। ਉਸ ਤੇ ਚੌਕਣ ਕਰੇ ਨਿਹਾਲ ਉਸ ਤੇ ਚੌਕਣ ਕਰੇ ਨਿਹਾਲ ਚੌਕਣ ਕਰੇ ਨਿਹਾਲ ਲਾਲ ਚਾਰਾ ਹੋਵੇ ਜੀ ਪਾਲਾ ਬੱਦੀ ਕੇ ਜਨੋ ਔਦੂ ਦੇਖਦਾ ਔਦੂ ਦੇਖਦਾ ਸਭ ਤੇ ਕੱਦ ਦਾ ਕੋਈ ਨਹੀਂ ਇਹ ਕਹਿਆ ਚੌਕਣ ਕਰੇ ਚੌਕਣ ਕਰੇ ਨਿਹਾਲ ਗੁਰਸਾਹਿਬ ਸਵਾਦਿਆ ਗੁਰਸਾਹਿਬ ਸਵਾਦਿਆ ਉਹ ਕਈ ਵਾਰੀ ਸਾਨ ਹੁੰਦਾ ਹੈ ਥੋੜਾ ਜਿਹਾ ਸਾਨ ਜਰ ਹੁੰਦਾ ਨਾ ਉਹ ਦੇਰ ਹੁੰਦਾ ਕਪਾ ਉਹ ਤਸਲੂ ਦੇ ਦੇ ਬਸ ਤੁਸੀ ਮਨਪੇਟਾ ਚਾਹੇ ਤੁਸੀ ਕੋਈ ਮਸਾ ਚਾਹੇ ਜੇ ਪਾਇਆ ਲੀ ਜਿਉਣਾ ਲੱਗਦੀ ਫਰੇ ਖਾਲੀ ਰਗਾ ਚਾਹੀ ਕੀ ਰਖਣੇ ਕੀ ਕਰਨਾ ਬਾਅਦ ਤੇ ਪਤਾ ਨਹੀਂ ਲੱਗਦਾ ਹੁਣ ਇਹ ਫਿਰ ਦੇਖੋ ਤਾਂ ਦੇ ਹੀਓ ਪਕੋਪੀਆ ਤਾਂ ਜਾਣਾ ਨਹੀਂ ਸਕਦਾ। ਅਜਾ ਬਾਫਰ ਉੱਕੇ ਦਰਦੋ ਜੇ। ਤਮੇ ਪਕੋਪੀਆ ਅੰਠਾ ਕਰਾ ਦਿਆ। ਜਾਓ ਥੋੜਾ ਦੇਖ ਕੇ ਦੇ ਸਾਥੀਆ ਹੋ ਗਿਆ। ਹਾਸੀ ਚੋੜ ਲਗੀ ਸੀ। ਠੀਕ ਹੈ। ਬਾਦ ਉਹ ਢੇਕਾ ਲੰਦਾ ਹੀ ਮਰਦਾ। ਸਰ ਸਰ ਸਰ ਚਾਉਂਦਾ ਨਹੀਂ ਹੋ ਗਿਆ ਹੋ ਗਿਆ। ਮੰਨ ਲਿਆ। ਦੇਹਾ ਹੂ ਤਾਂ ਹੀ ਚੌਕਣ ਕਰੇਦਾ ਤੇ ਤੇ ਦੂ ਵਤਾ ਹੋਵੇ ਮੈਂ ਕਹਿੰਦਾ ਇਹ ਗੱਲ ਸਹੀ ਹੈ ਜੀ ਤੁਮਾ ਨੇ ਹਾਲਾ ਦੀ ਗੱਲ ਦੀ ਗੁਰਬਾਣੀ ਦੀ ਕੋਈ ਸਾਡੇ ਫੁੱਟਰ 'ਚ ਫਰਕ ਹੈ ਗੁਰਬਾਣੀ ਦੇ ਬੋਲਨ ਕੋਈ ਫਰਕ ਮੰਨ ਲਿਆ ਤਾਂ ਉਹ ਵੀ ਗਿਆ ਉਹ ਵੀ ਗਿਆ ਉਹ ਤਰ੍ਹਾਂ ਤੇ ਵੀ ਕੁਝ ਸੀ ਇੱਕ ਪਾਸੇ ਤੇ ਹਟਾਉਣਾ ਉਫਾ ਸਾਡੀ ਸੰਪਦਾ ਦੇ ਜੀਬੀ ਕੋ ਪਾਸੇ ਦਾ ਅਟਾਖੇ ਜਿੱਦ ਵੀ ਯਸਤਾ ਤੇ ਜੁਦਾ ਦੇਣਾ ਹੋਵੇ ਟੋਲ ਨਾਨਕ ਸਾਹਿਬ ਸਦਾ ਬਿਹਾਰ ਨਾਨਕ ਸਾਹਿਬ ਸਦਾ ਬਿਹਾਰ ਸਹਿਤ ਕਰੇਗਾ ਲਾ ਬੋਲ ਜੇ ਦੇਉਣੀ ਯਾਰ ਜਿਆਦਾ ਲੱਗੇ ਬਹੁਤ ਫਿਰ ਖਾਲੀ ਹੈ ਇਹ ਕਿੰਨਾ ਜਿਆਦਾ ਹੈ ਜਿਆਦਾ ਹਲਕਾ ਜਾਂਦਾ ਕੋਈ ਆਸ ਜਦ ਮਾਇਆ ਨੂੰ ਤਾਂ ਹਲਕਿਆ ਦੈ ਉਹ ਕੋਈ ਫਾਇਦਾ ਸੁਖਾ ਨਹੀਂ ਮਿਲਦਾ ਜਿੰਨਾ ਵੀ ਉਹ ਮਾਰੀ ਰਹੀ ਹੈ ਅਨੇਕ ਜਿਹੜੀ ਕਰਦਾ ਸੀ ਜਦਵਾ ਕੀ ਕਰਦਾ ਹੈ ਕਰਦਾ ਹੈ ਗੁਰਬਾਨੀ ਉੱਪਰ ਚਾਹੀਦਾ ਹੈ ਵੇਲਾ ਪਰ ਨਹੀਂ ਹੁਣ ਪਰ ਕਹ ਬਾਤ ਪੱਤਰ ਪਰਖੇ ਆਪਣੇ ਸਰਆਪੋ ਜੀ ਲੋੜ ਹੈ ਜੇਦੋਂ ਕੋਈ ਬੜਾ ਹੈ ਕਹਦਾ ਕੋਈ ਬੜਾ ਕਹਦਾ ਕੋਈ ਬੜਾ ਕਹਦਾ ਕੋਈ ਕਹਿੰਦੇ ਕੋਝੰਦਰ ਤੇ ਪੜ੍ਹ ਕੇ ਸਭੀ ਸੱਚੀ ਚ ਬੜ ਕੇ ਪਰ ਕੇਮ ਜਵਾਸ ਹੋਊਗਾ ਬਿਨਾਂ ਪਰਖ ਦੇ ਵਿਸ਼ਵਾਸ ਜੀ ਕੇ ਨਹੀਂ ਹੋਣਾ ਪਰਖ ਤੇ ਵਿਸ਼ਵਾਸ ਹੈ ਨਾ ਵੀ ਪੱਥੀ ਬਹੁਤ ਬੋਲੀ ਕਹਿੰਦਾ ਕੀ ਦੇ ਲੈ ਕੇ ਹੇਤ ਪਰਮਾਤਮਾ ਨੂੰ ਦੇ ਕੇ ਹੀ ਆਇਆ ਪਰਖੋ